ਕਾਰਯੋਗ उपस्थित ਸਾਧ ਸੰਗਤ ਜੀਓ ਮਨ ਮ੍ਰਿਤੀ ਇਕਾਗਰ ਕਰਨ ਵਾਸਤੇ ਰਸਨਾ ਪਵਿੱਤਰ ਕਰਨ ਲਈ ਸਭ ਮਾਈ ਪਾਈ ਇੱਕ ਵਾਰੀ ਗੱਜ ਕੇ ਆਕੋ ਤਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਸ਼ਨ ਕੀਤੇ ਹੁਣ ਸਾਧ ਜੀ ਦੇ ਹੁਕਮ ਅਨੁਸਾਰ ਉਹਨਾਂ ਦੀ ਬਖਸ਼ੀ ਬੁੱਧੀ ਅਨੁਸਾਰ ਕੁਝ ਪ੍ਰਾਰਥਨਾਵਾਂ ਮੈਂ ਆਪ ਸੱਜਣਾ ਦੇ ਚਰਨਾਂ 'ਚ ਕਰਾਂਗਾ ਆਪਾਂ ਇੱਕ ਨਿੱਕੀ ਜੀ ਧਾਰਮ ਪੜ ਲਈਏ ਆਪਣੀ ਆਪਣੀ ਵਾਰੀ ਤੇ ਮੈਂ ਪੜਾਂਗਾ ਬਾਅਦ ਮੇਰੇ ਵੀਰ ਪੜਨ ਤੇ ਬਾਅਦ ਮਾਇਆ ਪੜ ਮਤ ਥੋੜੀ ਸੇਵ ਗਵਾਇਆ ਮਤ ਥੋੜੀ ਸੇਵ ਗਵਾਇਆ ਮਤ ਥੋੜੀ ਸੇਵ ਗਵਾਇਆ ਮਤ ਥੋੜੀ ਸੇਵ ਗਵਾਇਆ ਮਿੱਤੇ ਆਸ ਸਜ ਦੀ ਹੈ ਮੈਨੂੰ ਨੇ ਯਾਦ ਸਾਰੀ ਆਸਾ ਜਿਉ ਆ ਰਵੇ ਸਾਧਵਾ ਕੋਲ ਸੁਣ ਸੁਣ ਕੇ ਮੈਂ ਪੰਕਤੀਆਂ ਕੰੱਚ ਕੀਤੀਆਂ ਯਾਨੀ ਤੇ ਨਾ ਭੁੱਲਦਾ ਹਵਾ ਤੇ ਕੂੜ ਰਾਜਾ ਕੂੜ ਪ੍ਰਜਾ ਦਾ ਜਿਹੜਾ ਸ਼ਲੋਕ ਹੈ ਨਾ ਇਹਦੀ ਹੀ ਪੌੜੀ ਹੋਈ ਹੈ ਲਿਖਦੇ ਸਤਗੁਰ ਦਾਲ ਜੇ ਮਿਲਿਆ ਇਹ ਪ੍ਰਾਰਥਨਾ اے ਅਕਾਲ ਪੁਰਖ ਗਰੀਬ نواਸ ਸਤਿਗੁਰੂ ਜੀ ਮੈਂ ਦਾਨ ਮੰਗਣਾ ਤੇਰੇ ਕੋਲੋਂ ਤੇਰੀ ਤਲੀ ਦੀ ਖਾਕ ਇੱਕ ਉਤਲੇ ਪਾਸਾ ਹੁੰਦਾ ਪੈਰ ਦਾ ਤੇ ਢੇਠਾ ਪਾਸਾ ਹੁੰਦਾ ਤੇ ਉਤਲੇ ਪਾਸੇ ਤੇ ਸਮਝੋ ਉਨੀ ਘੱਟ ਮਿੱਟੀ ਪੈਂਦੀ ਹੈ ਤੇ ਬਹੁਤੀ ਮਿੱਟੀ ਦੇ ਨਾਲ ਢੇਠਾ ਪਾਸਾ ਰਹਿੰਦਾ ਇਸ ਪਾਸੇ ਜਾਂਦੇ ਨੇ ਉਹ ਜਿਹੜਾ ਢੇਠਾ ਪਾਸਾ ਨਾ ਉਹਦੀ ਖਾਤ ਮਿਲ ਜਾਏ ਇਹ ਅੱਜ ਕੱਲ ਤੋਂ ਜਿਹੜਾ ਬਾਪਾ ਜੀ ਇਹਨੇ ਖਾਕ ਦਾ ਸਵਾਲ ਹੀ ਨਹੀਂ ਪਾਇਦਾ ਹੁੰਦਾ ਨਾ ਮੱਥਾ ਟੇਕੇ ਕੋਈ ਦੂਰ ਹੀ ਦੁਰ ਜਾਂਦੇ ਨੇ ਉਹ ਪਤਾ ਹੀ ਖਾਕ ਹੈ ਵੀ ਕਿ ਹੈ ਜਿਹੜਾ ਨੂੰ ਹੱਥ ਲਾ ਕੇ ਤੁਰ ਜਾਂਦੇ ਨੇ ਸਤਿ ਸ੍ਰੀਕਾਲ ਖਾਕ ਮਿਲਦੀ ਤੇ ਕਿਉਂ ਮੰਗੀ ਇਹ ਚੀਜ਼ ਇਹਦੇ ਵਿੱਚ ਕੀ ਵਿਸ਼ੇਸ਼ਤਾ ਇਹ ਖਾਕ ਮੰਗੀ ਕਿਉਂ ਹੈ ਤੁਸੀਂ ਗੁਰਦੁਆਰਿਆਂ ਵਿੱਚ ਮੰਦਰਾਂਾਂ ਵਿੱਚ ਜਾਂਦੇ ਹੋ ਤੇ ਦਲੀਜਾਂ ਦੇ ਆਰ ਪਾਰ ਜਿਹੜੇ ਸਰੀਰ ਆਉਂਦੇ ਜਾਂਦੇ ਨਾ ਉਹਨਾਂ ਦੇ ਪੈਰਾਂ ਨਾਲ ਵਾਲੀ ਜ਼ਮੀਨ ਆ ਉਹ ਬਿਲਕੁਲ ਮਲੀਦਾ ਹੋਈ ਚਰਨ ਛੋਹ ਛੋ ਕੇ ਅੰਦਬਾਰ ਜਾਣ ਕਰਕੇ ਉਸ ਚਰਨ ਛੋਹ ਨੂੰ ਮਿੱਟੀ ਨੂੰ ਫਿਰ ਲੋਕੀ ਮੱਥੇ ਨਾਲ ਲਾ ਲੈਂਦੇ ਨੇ ਮੱਥੇ ਨਾਲ ਨਹੀਂ ਲਾਉਂਦੇ ਕਈ ਉਹਨੂੰ ਬਨ ਕੇ ਤੇ ਘਾੜ ਲੈ ਜਾਂਦੇ ਨੇ ਪੁੜੀਆਂ ਬਣਾ ਕੇ ਉਹ ਫਿਰ ਦੁੱਖ ਵਾਲੇ ਜਾਂ ਜਿੱਥੇ ਕੋਈ ਤਕਲੀਫ ਹੁੰਦੀ ਹੈ ਉਹਨੂੰ ਵਰਤਦੇ ਨੇ ਤੇ ਉਹਨਾਂ ਦਾ ਉਹਦੇ ਨਾਲ ਵੀ ਕਈ ਵਾਰੀ ਸਮਝੋ ਆਰਾਮ ਆ ਜਾਂਦਾ ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪੱਕਾ ਪਤਾ ਹੈ ਮੋਲੀ ਢੰਡੇ ਜਿੱਥੋਂ ਦਾ ਖੇਮ ਸਿੰਘ ਹੈ ਖੇਮ ਸਿੰਘ ਦੇ ਘਰੋਂ ਹੈ ਅਮਰ ਕੌਰ ਉਹਨਾਂ ਦਾ ਮੁੰਡਾ ਭਗਤ ਸਿੰਘ ਉਹ ਬੜਾ ਸਾਊ ਹੈ ਮੇਰਾ ਬਹੁਤ ਉਹ ਸਰਕਾਰ ਜੰਗ ਸਿੰਘ ਉਥੋਂ ਦਾ ਜਿਹੜਾ ਹੁਣ ਕਾਲਾ ਚਲਾ ਗਿਆ ਤੇ ਟੂੜੀ ਦਾ ਟਾਲ ਕਰਦਾ ਉੱਥੇ ਆ ਮੇਰਾ ਹਮ ਜਾਨ ਹੁੰਦਾ ਸੀ ਕਿ ਉਹ ਬੀਬੀ ਅਮਰਕੌਰ ਮੈਨੂੰ ਇੱਕ ਵਾਰ ਆਂਦੀ ਐ ਕਿ ਪੰਡਤ ਜੇ ਤੂੰ ਮੇਰੇ ਤੇ ਕਿਰਪਾ ਕਰੇ ਨਾ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜਿਹੜੀ ਮਿੱਟੀ ਲਿਆ ਦੇਣਾ ਬਹੁਤ ਖੁਸ਼ੀ ਹੋਏਗੀ ਮੈਂ ਕਿਹਾ ਇਹ ਕਿਹੜੀ ਬੜੀ ਗੱਲ ਐ ਮੈਂ ਲਿਆ ਦੇ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਰੋਜ਼ ਕਈ ਵਾਰੀ ਆਸਾ ਜੀ ਦਵਾਰ ਦਾ ਕੀਰਤਨ ਕਰਕੇ ਤੇ ਡੇਰਾ ਹੁੰਦਾ ਸੀ ਉਹ ਗੋਲ ਛੱਪਰ ਚ ਉਦੋਂ ਪਰਾਸ ਸਵੇਰੇ ਵਿਚਰਨ ਜਾਂਦੇ ਹਾਂ ਤੇ ਨੰਗੀ ਪੈਰੀ ਜਾਂਦੇ ਹਾਂ ਉਸ ਵਕਤ ਥੋੜਾ ਜਿਆਦਾ ਨੰਗੀ ਪੈਰੀ ਜਾਣਾ ਤੇ ਨੰਗੀ ਪੈਰੀਆਂ ਤੇ ਆ ਕੇ ਉਥੇ ਸਾਫ ਬਿਸ਼ਾ ਕੇ ਤੇ ਸਾਫ ਉਤੇ ਬਹਿੰਦੇ ਹਾਂ ਤੇ ਫੇਰ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਹੋਂ ਤਾਂ ਉਸ ਨਾ ਇਸੇ ਤਰ੍ਹਾਂ ਉਹ ਵੀ ਕਈ ਵਾਰੀ ਇਸੇ ਤਰ੍ਹਾਂ ਤਾਂ ਉਸ ਵਜਾਦੇ ਹੁੰਦੇ ਉਹ ਸੱਚੇ ਪਾਤਸ਼ਾਹ ਉੱਥੇ ਆ ਕੇ ਬੈਠ ਗਿਆ ਉਹ ਚਰਨ ਉਹਨਾਂ ਜ਼ਮੀਨ ਦੇ ਉੱਤੇ ਧਰ ਦਿੱਤੇ ਉੱਠ ਕੇ ਚਲੇ ਜਾ ਉਹਨਾਂ ਦੇ ਚਰਨਾਂ ਨੇ ਜਿੱਥੇ ਸਮਝੋ ਸਪਰਸ਼ ਕੀਤਾ ਸੀ ਨਾ ਉਸ ਥਾਂ ਤੋਂ ਮੈਂ ਮਿੱਟੀ ਇਕੱਠੀ ਕਰਕੇ ਨਾ ਵਾ ਵਾ ਇੰਨੀ ਪੂਰੀ ਬਣ ਕੇ ਤੇ ਬੀਬੀ ਅੰਮ੍ਰਿਤਕੌਰ ਨੂੰ ਦੇ ਦਿੱਤੀ